गुजरी की वार मोहल्ला 5 एक ओंकार सतगुरु प्रसाद शलोक मोहल्ला 5 अंतर गुरु आराधना जेवा जप गुरु नाव मैत्री सत हां श्रोणि सुनना गुरु नाव उत्तर गुरु आराधना नहीं है गुरु आराधना ही वैसे पढ़ते रहे हम लोग अंतर गुरु आराधना अच्छा जी आराधना नहीं आया? है आराधना ਉਹ ਲੋਗਾਂ ਨੂੰ ਕਿਹਾ ਕਿ ਤੂੰ ਆ ਜਾ ਉਹਦੇ ਵਾਸਤੇ ਇੱਛਾ ਧਾਰ ਕੇ ਰੱਖਣੀ ਯਾਦ ਰੱਖਣੀ ਉਹਨੂੰ ਆਰਾਧਨਾ ਕਰਨੇ ਕੋਈ ਬੰਦਾ ਬਾਹਰ ਗਿਆ ਹੋਇਆ ਠੀਕ ਹੈ ਇੱਛਾ ਬਣੀ ਹੋਈ ਹੈ ਵੀ ਜਲਦੀ ਹੋ ਸਕੇ ਆ ਜਾਵੇ ਉਹਨੂੰ ਆਰਾਧਨਾ ਹੈਣ ਆਉਣ ਵਾਸਤੇ ਅੜੇ ਤਾਂ ਉਹਦਾ ਹੋਈ ਸਕਦਾ ਪਤਾ ਨਹੀਂ ਕਿ ਉਹ ਨੇ ਹਾਂ ਅੰਤਰ ਗੁਰ ਆਰਾਧਨਾ ਜਿਹਾ ਜਪ ਗੁਰ ਅਰਾਧਨਾ ਕੀਦੀ ਕਰਦੀ ਐ ਜਿਹੜਾ ਅੰਦਰ ਹੈ ਸਤਿਗੁਰ ਅੰਦਰ ਅੰਤਰਗੁਰਤਾ ਹਾਇੋ ਪੜੇ ਮੂਲ ਨੂੰ ਅਰਾਧਨਾ ਅਰਾਧਨਾ ਆਪਣੇ ਮੂਲ ਵੱਲ ਧਿਆਨ ਆਤਮ ਧਿਆਨ ਕਈ ਕੋਟ ਆਤਮ ਧਾਂਤ ਧਾਰੀ ਕਈ ਕੋਟ ਆਤਮ ਆਤਮ ਧਿਆਨ ਧਾਰੀ ਜਿਹੜੇ ਅਰਾਧਨਾ ਨਹੀਂ ਕਰਦੇ ਜੀ ਸਤਿਗੁਰ ਦੀ ਅੰਤਰਗੁਰ ਅਰਾਧਨਾ ਜੇ ਵਾਜਾ ਗੁਰੂ ਨਾਲ ਛਪੜਾ ਕਹਿੰਦੇ ਜੇਬਾ ਨਾਲ ਜੀਵ ਨਾਲ ਨਹੀਂ ਪਰ ਬਹੁਤ ਨਾਲ ਜੇ ਆਰਾਧਾ ਹੱਦੇ ਵਿੱਚ ਕਰਾ ਲਈਏ ਤਾਂ ਮਤਲਬ ਇਹ ਨਹੀਂ ਕਿ ਮੰਦੀ ਜੀਵ ਵੀ ਚੁੱਪ ਹੋ ਗਈ ਬਹੁਤੀ ਜੀਵ ਹੋ ਰਹਿ ਮਦੀ ਇੱਛਾ ਹੀ ਮੰਦੀ ਜੀਵ ਹੈ ਜਿਹਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਉਹ ਜੀਵ ਹੈ ਕੋਈ ਇੱਛਾ ਜੋ ਪੈਦਾ ਹੁੰਦੀ ਹੈ ਉਹਨੂੰ ਪ੍ਰਗਟ ਕਰਦੇ ਆਂ ਸੀ ਜੀਵ ਨੂੰ ਜੇਵਾਲ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਜੀਵ ਨਾਲ ਪ੍ਰਗਟ ਕੀਤੀ ਜਾਂਦੀ ਹੈ ਇੱਛਾ ਦੱਸੀ ਜਾਂਦੀ ਹੈ ਕਿਸੇ ਅੰਦਰ ਕੋਈ ਇੱਛਾ ਹੈ ਉਹ ਇਸ਼ਾਰੇ ਨਾਲ ਕਿਸੇ ਨੂੰ ਬੁਲਾਉਂਦਾ ਹੈ ਪਹਿਲਾਂ ਤਾਂ ਐਨੀ ਉੱਚੀ ਆਵਾਜ਼ ਨਿਕਲ ਸਕਦਾ ਜਦੋਂ ਉਹਦੇ ਨੇੜੇ ਆ ਜਾਂਦਾ ਹੌਲੀ ਦੇ ਕੇ ਉਹਦੇ ਕੰਨ ਹੌਲੀ ਦੇ ਕੇ ਜਿੰਨਾ ਕੋ ਬੋਲ ਸਕਦਾ ਜਿੱਦੀ ਤਾਕਤ ਹੁੰਦੀ ਹੈ ਉਹ ਪ੍ਰਗਟ ਕਰਦਾ ਵੀ ਮੈਨੂੰ ਆਹ ਚੀਜ਼ ਚਾਹੀਦੀ ਠੀਕ ਹੈ ਜੀ ਗੁਰ ਗੁਰ ਆਰਾਧਨ ਉਹ ਜਿਹੜਾ ਸਤਗੁਰਾ ਇਹਦੀ ਆਰਾਧਨਾ ਕਰਦੀ ਬਾਹਲ ਦੇ ਦਿੱਕਨ ਦੀ ਦਸੇ ਗੁਰੂ ਛੁੱਟ ਗਏ ਸਾਡੇ 11 ਦੇ 11 ਸਾਰੀ ਦੁਨੀਆ ਹੀ ਛੁੱਟ ਗਈ ਬਾਹਲ ਦੀ ਛੱਡੋ ਤੁਸੀਂ ਗੁਰੂਆਂ ਦੀ ਕੀ ਗੱਲ ਹੈ ਬਾਹਲ ਦੀ ਦੁਨੀਆ ਕਲੈਕਸ਼ਨ ਹੈ ਟੁੱਟ ਜਗਰ ਅੰਤਰਗੁਰ ਆਰਾਧਨਾ ਹੋਦੀ ਕਰਨੀ ਹੈ ਬਾਹਰ ਤਾਂ ਕਨੈਕਸ਼ਨਾਂ ਪੇ ਟੁੱਟ ਗਿਆ। ਦਾਦਾ ਕੋਈ ਬਾਹਰ ਤਿਰਥ ਰਹਾ। ਨਾ ਕੋਈ ਸਰੋਵਰ ਰਹਾ, ਨਾ ਗੁਰੂਗ੍ਰੰਥ ਰਹਾ, ਕੁਛ ਬਦੀ ਰਹਾ ਬਾਹਰ। ਠੀਕ ਕਨੈਕਟ ਹੋ ਗਿਆ ਬਾਦੋ। ਸੰਸਾਰ ਨਾਲ ਠੀਕ ਕਨੈਕਟ ਹੋ ਗਿਆ। ਠੀਕ ਹੈ। ਜੇ ਅੰਤਰਗੁਰ ਆਰਾਧਨਾ ਜੁੜ ਹੋਈ। ਸਤ ਸੰਤੋਖ ਦੇ ਘਰੇ ਦੇ ਅੰਦਰ ਹੈ। ਮਾਇਆ ਬਾਹਰ ਰਹਿ ਗਈ। ਅਰਾਧਨਾ ਹੁੰਦੀ ਹੋਈ ਜਪਣ ਤੋਂ ਬਾਅਦ ਜਾਂ ਜਪ ਲਿਆ ਨਾਨਕ ਗੁਰਮੁਖ ਨਾਮ ਜਪੀ ਐ ਇੱਕ ਵਾਰ ਇੱਕ ਵਾਰ ਜਪ ਲਿਆ ਨਾ ਸਮਝ ਲਿਆ ਸਭ ਕੁਝ ਇੱਕ ਵਾਰ ਫਿਰ ਅਰਾਧਨਾ ਜਪ ਗੁਰਨਾਮ ਇਹ ਕੀ ਹੁੰਦਾ ਜੀ ਗੋਲੋਂ ਗੋਲ ਕਾ ਜਸ ਵੀ ਜਪਣ ਦੀ ਗੱਲ ਆਉਂਦੀ ਐ ਅਸੀਂ ਸੋਚਦੇ ਐ ਉਚਾਰਨ ਕਰਨਾ ਹੈ ਪਰ ਜਪ ਦਾ ਅਰਥ ਸਮਝਣਾ ਹੈ ਜੀ ਸਮਝਣਾ ਠੀਕ ਹੈ ਜੀ ਗੁਰੂ ਮੁਕਰ ਕੇ ਚਲਦੇ ਅੱਛਾ ਜੀ ਚਲਣਾ ਹੁੰਦਾ ਪੌਂਟ ਹਾਂਜੀ ਸਾਰੇ ਗੁਰਾਂ ਚੋ ਹੀ ਤੇ ਹੀ ਦਰਸ਼ਨ ਹੋਣਾ ਸਾਰੀ ਗੁਰਬਾਣੀ ਸਭ ਇੱਥੇ ਹੀ ਦਰਸ਼ਨ ਸੁਣਨਾ ਗੁਰ ਜੇ ਨੇਤਰੀ ਸਤਗੁਰੂ ਵੇਖਣਾ ਹੈ ਤਾਂ ਆ ਗੱਲ ਹੋਊਗਾ ਹੁਣ ਦਰਸ਼ਨ ਦੀ ਗੱਲ ਆ ਗਈ ਜਪੁਣ ਤੇ ਬਾਅਦ ਦਰਸ਼ਨ ਹੋਣਾ ਹੁਣ ਜਪਤਾ ਬਾਅਦ ਨੇ ਦਰਸ਼ਨ ਹੋਣਾ ਅੰਦਰੋਂ ਬਾਅਦ ਤਾਂ ਕਨੈਕਸ਼ਨ ਟੁੱਟ ਗਿਆ ਬਾਹਰ ਦਾ ਸਤੂਰ ਕੋਈ ਰਹਿਿਆ ਹੀ ਨਾ ਇਸ ਕਰਕੇ ਜਿੰਨੇ ਸਤਗੁਰ ਨੇ ਇਹਨਾਂ ਨੂੰ ਅਸੀਂ ਸਤਗੁਰ ਕਹਿੰਦੇ ਆ ਉਹ ਭਾਈ ਕਹਿੰਦੇ ਨੇ ਸਤਗੁਰ ਨੇ ਕਹਿੰਦੇ ਅੱਛਾ ਜੀ ਉਹ ਭਾਵੇਂ ਸਤਗੁਰ ਨੇ ਨਾ ਉਹਨਾਂ ਦਾ ਸਤਗੁਰ ਹੈ ਸਤਗੁਰ ਨੂੰ ਕਿਹਾ ਜਾ ਸਕਦਾ ਜਿਹਦੇ ਸਤਪੁਰਖ ਨੂੰ ਜਾਣ ਲੈ ਸਤਗੁਰ ਜਾ ਨੇਤਰਿਆਂ ਸਤਗੁਰੂ ਵੇਖਣਾ ਜਾਂ ਨੇ ਨੇ ਸਤਗੁਰੂ ਵੇਖ ਲਿਆ ਸਤਗੁਰੂ ਆਪੇ ਬਣ ਗਿਆ ਉਹ। ਜੇ ਤਰੀਏ ਸਤਗੁਰੂ ਵੇਖਣਾ ਸ਼ਰਵਣੀ ਸੁਣਨਾ ਗੁਰਨਾਮ ਦੇਖਣਾ ਨਹੀਂ ਹੈ। ਹਾਂਜੀ। ਦੇਖੀਦਾ ਬਹਾਲਦੀ ਅੱਖ ਨਾਲ ਪੇਖੀਦਾ ਅਦਲੀ ਅੱਖ ਨਾਲ। ਸੁਪਨਾ ਪੇਖੀਦਾ ਹੋਂਦ ਸੁਪਨਾ ਦੇਖੀਦਾ ਨਹੀਂ ਹੁੰਦਾ। ਜੋ ਸੁਪਨਾ ਹੋਰ ਵੇਖਣਾ। ਜਿੰਵੇਂ ਤੇ ਜੋ ਅਸੀਂ ਪੜਦੇ ਤੇ ਦੇਖ ਰਹੇ ਆ ਪੇਖ ਰਹੇ ਆ ਅਸਲ ਚ। ਦੇਖੀਦਾ ਉਹਦਾ ਸੱਚ ਦੇਖੀਦਾ ਉਹਦੀ ਨਕਲ ਝੂਠ ਜੇ ਦਰਖਤ ਦਾ ছায়ਾ ਦੇਖੀਏ ছায়ਾ ਉਹਦੇ ਨਾਲ ਦਰਖਤ ਨਹੀਂ ਦੇਖਿਆ ਜਾਂਦਾ ਦਰਖਤ ਦਾ ਸਰੂਪ ਦੇਖਿਆ ਜਾਂਦਾ ਠੀਕ ਹੈ ਜੀ ਦਰਖਤ ਦਾ ਰੂਪ ਦੇਖਿਆ ਉਹ ਦੇਖਿਆ ਬੰਦੇ ਠੀਕ ਹੈ ਜੀ ਪੇਖਣਾ ਰਵਣੀ ਸੁਣਨਾ ਗੁਰਨਾਮ ਜੇ ਨੇ ਇਤਰੀ ਸਤਗੁਰ ਪੇਖ ਲਿਆ ਤਾਂ ਸਤਗੁਰ ਬਣ ਵੀ ਗਿਆ ਤੇ ਜਿਨ ਜਾਣਿਆ ਸੋ ਤੁਸੀਂ ਜਿਹਾ ਅੱਤ નિર્ਮਲ ਸੀਜਸ ਦੇਹ ਸੁਨ ਸਾਰੀ ਸੀਜਸ ਦੇਹਾ ਇੱਥੇ ਗੁਰਦਲ ਨਹੀਂ ਸੁਲਜੀ ਕੀ ਜਿਹੜੀ ਗੁਰਦਲ ਨਹੀਂ ਆਣਾ ਇਹਨੂੰ ਸੁਣੀ ਕਹਿੰਦੇ ਨੇ ਗੁਰਦਲ ਨਹੀਂ ਸੁਣਦੀ ਸਤ ਸੱਚ ਨਾਲ ਜੁੜਿਆ ਸੱਚ ਦਾ ਦਰਸ਼ਨ ਹੋਇਆ ਗੁਰਦਲ ਨਹੀਂ ਸੁਣਦੀ ਇਹਨੂੰ ਕਹਿ ਰਹੇ ਨੇ ਪਟ ਕੁੰਡਲ ਦੀ ਸਰਜੀ ਸਤਿਖਾਏ ਕੁੰਡਲ ਦੀ ਸਰਜੀ ਦੀ ਜਦ ਅੰਦਰੋਂ ਦਰਸ਼ਨ ਹੋਇਆ ਸਤਿਗੁਰ ਦਾ ਆਪ ਵੀ ਸਤਿਗੁਰ ਬਣ ਦੋ ਮੰਨ ਦਾ ਸਤਿਗੁਰ ਹੋਰ ਹੈ ਮੈਂ ਹੋਰ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਬਣੇ ਹਾਂਜੀ ਇਹ ਗੁਰਨਾਵਾਂ ਹੋਣਾ ਸੁਣਨਾ ਹੈ ਦੁਰਤੀ ਬਾਣੀ ਇਹ ਸਰਬ ਨੇ ਸੁਣਨੇ ਹੁਣ ਕੰਨਾਂ ਨਾਲ ਨਹੀਂ ਸੁਣੀ ਬਿਨਾ ਕੰਨਾਂ ਤੇ ਸੁਣਨੇ ਆ ਸੁਣੀ ਚਲੀ ਗਈ ਹੁਣ ਫਿਰ ਗੁੱਡੀ ਛੁੱਟ ਗਈ ਦਸਵਾ ਦਵਾਰ ਖੁੱਲ ਗਿਆ ਦਸਵੇਂ ਦਵਾਰ ਤੇ ਅੱਧੀ ਵਿਵਸਥਾ ਹੈ ਬਿਨੁ ਤੁਰਿਆ ਵਸਤਾ ਕਹਿਣ ਅੱਛਾ ਜੀ ਇਹ ਦੋਹੇ ਜਗ੍ਹਾ ਗੁਰਨਾਵ ਆਉਂਦਾ ਪਹਿਲੀ ਪੰਕਤੀ 'ਚ ਆਉਂਦਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਵ ਇਹ ਹੈਗਾ ਜੋ ਗੁਰਬਾਣੀ 'ਚੋਂ ਗਿਆਨ ਪੜ੍ਹਨਾ ਹੈ ਜੀ ਪੇ ਜਿਹੜਾ ਦੂਸਰਾ ਹੈ ਨੇਤਰੀ ਸਤਗੁਰ ਪ੍ਰੇਖਣਾ ਸੁਰਣੀ ਸੁਣਾ ਗੁਰਨਾ ਇਹ ਹੁਣ ਫੇ ਬਾਣੀ ਗੁਰੂ ਦੀ ਗੱਲ ਹੋ ਰਹੀ ਹੈ ਜੀ ਉਹ ਸੁਣਾ ਦਾ ਗੁਰਦਾਈ ਜਾ ਅੱਛਾ ਜੀ ਜੋ ਵੀ ਤਾਂ ਸਤ ਗੁਰ ਤੋਂ ਹੀ ਪਾਇਆ ਜਾਣਾ ਤੁਸੀਂ ਕੀ ਲੈਣਾ ਕਿੱਥੋਂ ਆਉਂਦਾ ਬਾਣੀ ਸ਼ਹਿਰ ਦੀ ਸਪਲਾਈ ਲੈਂਨਉਦੀ ਆ ਤੁਹਾਡੇ ਘਰ ਆਉਂਦੀ ਉਹ ਤੇ ਸਾਰੇ ਸ਼ਹਿਰ ਨੂੰ ਸਪਲਾਈ ਕਰਦਾ ਇਹੋ ਕਦੀ ਰਾਹ ਇਹੋ ਦਾ ਮੂੰਹ ਜੋੜਨਾ ਅੱਠੇ ਜੀ ਦੇ ਪੈਰ ਉੱਤੇ ਜਾ ਕੇ ਆਪਣਾ ਅਸਲਾ ਪੂਰਾ ਕਰਨਾ ਸਾਰੇ ਜੀ ਜੱਤ ਦਾ ਧਾਕਰ ਠੀਕ ਹੈ ਜੀ ਪੈਂਦਾ ਗਾਲੀ ਹੋ ਰਹੇ ਦੀਏ ਤੇ ਜਿਹੜਾ ਫਿਰ ਸਰਵਣੀ ਸੁਣਨਾ ਗੁਰਨਾਮ ਹੈ ਗੱਦੀ ਦੀ ਹੈ ਸਰਵਣ ਸ਼ਕਤੀ ਹੈ ਅੱਛਾ ਜੀ ਸੋਲਣਾ ਸ਼ਕਤੀ ਦਾ ਨਾਮ ਸਰਵਣ ਤਨ ਇਹ ਸੁਣਣ ਵਾਸਤੇ ਸਾਧ ਤੈ ਸੁਣ ਦਾ ਸਾਧਨ ਆਏ ਜੀ ਕੰਨ ਮਾਇਆ ਹੀ ਸੁਣ ਸਕਦੇ ਆਂ ਸੀ ਇਹਦੇ ਵਿੱਚ ਡਾਇਰੈਕਟ ਸੁਣ ਸਕਦੇ ਸਰਵਣ ਸੁਤੀ ਆ ਡਾਇਰੈਕਟ ਸੁਣ ਸਕਦੇ ਆ ਅੱਛਾ ਜੀ ਤੁਰਕੀ ਬਾਣੀ ਨੂੰ ਸੁਣ ਸਕਦੇ ਤੇ ਕੱਲ ਸੁਣਦੇ ਹੁਣ ਤਾਂ ਬਾਅਦ ਪਤਾ ਲੱਗੇ ਇੱਕ ਦੂਜੇ ਨੂੰ ਬੋਲਦਾ ਗੱਲਾਂ ਕਰਦਾ ਫਿਰ ਪਤਾ ਲੱਗੇ ਲੋਕਾਂ ਸਾਰਿਆਂ ਨੂੰ ਸਰਵਣੀ ਸੁਣਦੇ ਕੋਲ ਇਹ ਜ਼ਾਕਾ ਸ਼ਾਬਾਜ਼ ਪਾਇਆ ਹੋਇਆ ਹੈ ਰੋਜ਼ ਨਿਤਨੇਮ ਦੇ ਵਿੱਚ ਚਾਹ ਦੇ ਦੀਆਂ ਪਰਤਾਂ ਫੁੱਲਦੀਆਂ ਨੇ ਜਦ ਪਤਾ ਲੱਗਦਾ ਦੋ ਪਦਾਨ ਤੋਂ ਮਿਲਿਆ ਦੋ ਅਗਲੀਆਂ ਦੀ ਗੱਲ ਅੱਛਾ ਜੀ ਹਮ ਦਰਗਾ ਪਾਈ ਗੱਲ ਦਰਗਾ ਦੀ ਆ ਗਈ ਸੰਸਾਰ ਦੀ ਤਾਂ ਨਾਲ ਹੀ ਠੀਕ ਹੈ ਸੰਸਾਰ ਤਾਂ ਛੱਟਿਆ ਹੋਇਆ ਸਤਗੁਰ ਸੇਤੀ ਰੱਤੇ ਆ ਜੇ ਸਤਗੁਰ ਦੇ ਨਾਲ ਮਿਲ ਕੇ ਰੱਬ ਹੋ ਜਾਈ ਚੜ ਦੇ ਨਾਲ ਸਤਗੁਰਦਾਰ ਤੇਰਾ ਪਛਾਣ ਲੈਣਾ ਮਿਲ ਜਾਏ ਦੋਹਾਂ ਦੀ ਪਛਾਣ ਹੋ ਜਾਏ ਸਤਗੁਰ ਜੇ ਤੂੰ ਚਲਾ ਜਾਏਗਾ ਕਿਸੇ ਪਛਾਣ ਦੀ ਕੋਲ ਉਹਨਾਂ ਦਾ ਰੋਜ਼ ਦਾ ਬੈਠਾ ਕੁਰਸੀ ਤੇ ਠੀਕ ਦੇ ਵਿੱਚ ਸਮਾ ਗਿਆ ਸਤਗੁਰ ਸੇਤੀ ਰੱਤੇ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਕੋ ਨਾਨਕ ਕਿਰਪਾ ਕਰੇ ਇਹ ਅਗਰਪਾ ਪੂਰ ਕਰਪਾ ਹੋਏ ਜਿਸ ਨੂੰ ਇਹ ਵਤ ਦੇ ਜਿਸ ਇਹ ਵਸਤੂ ਦੇ ਦੇਵੇ ਇਹ ਵਸਤੂ ਅਖੀਰਲੀ ਵਸਤੂ ਹੈ ਰਾਮ ਹੈ ਅੱਛਾ ਜੀ ਜਿਸ ਦੇ ਵਤ ਵਸਤੂ ਚੱਕ ਉਤਮ ਕੱਢੀਏ ਫਿਰ ਕੇ ਸਾਰੇ ਸੰਸਾਰ ਚੋਂ ਕੋਈ ਵਿਰਲਾ ਨਿਕੜੂਗਾ ਆ ਜੀ ਆਇਆ ਕੋਈ ਹੈ ਨਹੀਂ ਨਾਲੇ ਜਿੰਨੇ ਜਾਇਦ ਵਾਲੇ ਨੇ ਵਰਗੇ ਇਹ ਜਿਉਂਦੇ ਨੇ ਉਹਨਾਂ ਚ ਵੀ ਨਹੀਂ ਸੀ ਕੋਈ। ਨਾ ਜਿਹੜੇ ਇਹਨਾਂ ਨੇ ਚਲੋਣੀ ਕਮੇਟੀ ਮੈਂਬਰ ਹੋਏ ਨੇ ਕੋਈ ਸੀ। ਨਾ ਜਿਹੜੇ ਹੈਗੇ ਨਾ ਸੀ। ਹੋਰ ਗੱਲਾਂ ਬਹੁਤ ਸੀ ਪਰ ਇਹ ਗੱਲ ਨਹੀਂ ਸੀ। ਤੇ ਉਹਦੀ ਉਹ ਟੀ ਗੱਲ ਕੇ ਜਾਂਦਾ। ਚਾਰੇ ਬਦਾਰਥਾਂ ਵਾਲੇ ਮਿਲਦੇ ਨਿਕਲਦੇ ਦੋ ਬਦਾਰਥਾਂ ਵਾਲੇ ਬਹੁਤ ਨੇ। ਉਹ ਬਦਾਰਥ ਲੈ ਕੇ ਗੁਰੂ ਘਰ ਚਾ ਜਾਂਦੇ ਨੇ ਆਉਂਦੇ ਰਹੇ ਨੇ। ਤੇ ਦੋ ਗੁਰੂ ਘਰ ਤੋਂ ਮਿਲਦੇ ਪਦਾਰਥ ਇਸੇ ਕਰਕੇ ਕਿ ਜਿੱਤ ਦੁਆਰੇ ਉਪਰੇ ਤੇ ਤੇ ਲਈ ਉਪਰ ਭਾਵੇਂ ਕੋਈ ਮੁਸਲਮਾਨਾ ਜੋ ਆ ਗਿਆ ਫਰੀਦ ਸੱਤਾ ਬਲਵੰਦ ਸਦਨਾ ਕਸਾਈ ਕਬੀਰ ਵੀ ਸੀ ਉਹਨਾਂ ਨੇ ਭਾਵੇਂ ਕੋਈ ਨਾਮਦੇਵ ਆ ਗਿਆ ਜਵਾ ਜੋ ਆ ਗਿਆ ਭਾਵੇਂ ਜੋਗੀਆਂ ਜੱਟੀਆਂ ਸੰਤਿਆਸੀਆਂ ਜੋ ਆ ਗਿਆ ਪਿੱਛੇ ਲਿਸਤ ਹੈਗੀ ਹੈ ਦੋ ਪਦਾਰਥ ਇੱਥੇ ਆ ਕੇ ਮਿਲਦੇ ਜਿਸ ਨੂੰ ਇਹ ਵਾਥ ਦੇ ਚੌਥਾ ਫਿਰ ਜਨਪਦਾਰਥ ਹੈ ਦੋ ਪਦਾਰਥ ਇਕੱਠੇ ਚ ਚੌਥਾ ਦੋਨ ਪਰਚਾਈਤਨ ਦਰਸ਼ਨ ਤੀਰ ਚੌਥਾ ਦੋ ਨੇ ਇਹਨਾਂ ਦਰਛਲ ਦੀ ਦੋ ਇਕੱਠੇ ਮਿਲਦੇ ਹੁੰਦੇ ਠੀਕ ਹੈ ਮਿਲਦਾ ਪਹਿਲੂ ਦੋ ਹੁੰਦੇ ਨੇ ਛਿੱਕਾ ਤਾਂ ਇੱਕ ਤਾਂ ਦੋ ਹੀ ਨੇ ਉਹਦੇ ਇੱਕ ਨਹੀਂ ਮਿਲਦਾ ਗੱਲਾਂ ਕਿਸੇ ਨੂੰ ਠੀਕ ਹੈ ਜੇ ਸੱਤ ਮਿਲੂ ਤਾਂ ਸਦੋਖ ਮਿਲੂਗਾ ਜੇ ਨਾ ਮਿਲੂ ਤਾਂ ਜਨਪਦਾਰਥ ਮਿਲੂਗਾ ਤਨ ਆ ਮਰੂ ਤੋ ਸਾਲ मिलू ਮਰੂ ਨਾ ਹਾਂਜੀ ਮਹੱਲਾ ਪੰਜਵਾਂ ਰੱਖੇ ਰਖਣ ਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੁਣ ਕੀ ਹੈ ਅਵਸਥਾ ਪਦਾਰਥ ਮਿਲ ਗਏ ਚਾਰੇ ਜਿਸ ਸਾ ਜੀਵਨਾਂ ਦਾ ਕਰਾਂ ਰੂ ਪਿੰਨ ਰੱਖੂਗਾ ਰੱਖਣਹਾਰ ਭਗਵੇਂ ਰੱਖੀ ਕਰੂਏ ਦੀ ਆਓ ਰੱਖਣਹਾਰ ਆਵੇ ਦੀ ਰੱਖੀ ਕਰੂਗਾ ਦੇਖਾ ਭਲਾ ਦੇ ਨੇੜੇ ਕੌਣ ਆਉਂਦਾ ਰੱਖੇ ਰੱਖਣਹਾਰ ਆਪ ਉਵਾਰਿਆ ਨਾ ਅਲ ਹੋਰ ਵੀ ਗੱਲ ਹੈ ਕੇ ਵੀ ਰੱਖੂ ਥਲੇ ਰੁਬ ਨਹੀਂ ਜਾਣ ਦਿੰਦਾ ਇਹਦੀ ਅਵਸਥਾ ਨੂੰ ਐਸਾ ਉਪਦੇਸ਼ ਦਿੱਦਾ ਰਹੂਗਾ ਇਦਨਾ ਇਹਦਾ ਮਨ ਤੇ ਤਰ ਹੂਗਾ ਟਿਕਿਆ ਰਹੂਗਾ ਕਉਚੇ ਤਾ ਉੱਚਾ ਬਗਵਾਨ ਤੋ ਕੀ ਪੜਾਈ ਦਿੰਦਾ ਰਹੂ ਹੋਰ ਪੜਾਈ ਕਿਹੜਾ ਮੁੱਖ ਗਈ ਆ ਤਾਂ ਬਿਲੀਮਮ ਪੜਾਈਆ ਬਿਲੀਮਮ ਕੁਰਬਾਨੀ ਦੀ ਪੜਾਈ ਮਿਣੀਮਮ ਵਾਸਤੇ ਹੈ ਤੋਂ ਮੈਕਸਿਮਮ ਜਾਣਾ ਹਾਂ ਪੈਰੀ ਪਾਏ ਕਾਜ ਸਵਾਰੀਆਂ ਗੁਰ ਪੈਰੀ ਪਾਏ ਜਾਗੋ ਦੇ ਪਿੱਛੇ ਮਤਲਬ ਉਹ ਹੀ ਚਲਿਆ ਗਿਆ ਕਾਜ ਸਵਾਰੀਆਂ ਕਿਹਦਾ ਕਾਜ ਉਹਨੇ ਸਲਾਮ ਨਾ ਵਿਗੜ ਦੇਣਾ ਹੀ ਨਹੀਂ ਹੁਣ ਕਾਜ ਨਹੀਂ ਵਿਗੜ ਸਕਦਾ ਇਕ ਤਾਂ ਦੋਹਾਂ ਦੀ ਭਗ ਹੋਏ ਨਹੀਂ ਸਕਦੀ ਹੁਣ ਠੀਕ ਹੈ ਜੀ ਉਹ ਆਪ ਦਇਆਲ ਮਨੋ ਨਾ ਵਿਚਾਰੀਆਂ ਜਦ ਆਪੇ ਦਇਆਲ ਹੋ ਗਿਆ ਫੇਰ ਉਹ ਮਨੋ ਨਹੀਂ ਵਿਸਾਰਦਾ ਇਹ ਨੂੰ ਮਨੂ ਮਨੋ ਨਹੀਂ ਵਿਸਾਰਦਾ ਹੁਣ ਵਿਸਾਰੇ ਹੋਏ ਆ ਅਸੀਂ ਜੇ ਅਸੀਂ ਉਹਨੂੰ ਵਿਸਾਰੇ ਹੋ ਵੀ ਵਿਸਾਰੇ ਹੋਏ ਉਹਨੇ ਐ ਨਹੀਂ ਵਿਸਾਰੇ ਹੋਏ ਆਤਮਾ ਕਰਕੇ ਬਸਾਰੇ ਹੋਇਆ ਆਂ, ਸ਼ਰੀਰ ਕਰਕੇ ਦੀ ਬਸਾਰੇ ਹੋਇਆ। ਸ਼ਰੀਰ ਦੀ ਰੋਜੀ ਰੋਟੀ ਦਿੰਦਾ ਆ, ਆਤਮਾ ਵਾਲੀ ਕਹਿੰਦਾ ਤੂੰ ਚੁਗਲੋ ਆਫੇ ਚੋਗਾ ਜਾਜਾ ਤੁਮ ਲੋੜ ਹੈ। ਕੋਈ ਕਿਸੇ ਤੇਰੇ ਜਾਂਦਾ ਕੋਈ ਕਿਸੇ ਤੇਰੇ ਜਾਂਦਾ ਜਾਓ ਜਿੱਥੇ ਲੋੜ ਲੱਗਦਾ। ਜਿੱਥੋਂ ਕੋ ਤੁਮ ਲਾਲੇ ਮਿਲਦਾ ਭਾਈ ਉੱਥੇ ਚਲੇ ਜਾਓ। ਇਹ ਆਤਮਾ ਦੇ ਚੋਗੇ ਕਰਕੇ ਬਸਾਰੇ ਹੋਇਆ ਆਂ। ਸ਼ਰੀਰ ਦੇ ਚੋਗੇ ਕਰਕੇ ਦੀ ਬਸਾਰੇ ਹੋਇਆ। ਇਹ ਤਾਂ ਬਣਾਉਣਾ ਬਸਾਰੀਆਂ ਨਾਲ ਹੀ ਗੱਲ ਫਟੌਲੀਓ ਦੀ ਤੁਹਾਡੀ ਕਿਤੇ। ਉਹ ਵਿਦਵਾਨਾਂ ਨੇ ਤਾਂ ਰਹਿ ਹੀ ਤੀ ਬਾਹਰ ਹੈ ਗੱਲ ਸਮਝ ਲਈ ਠੀਕ ਹੈ ਜੀ ਉਹਨਾਂ ਦਾ ਰੈਂਜ ਹੁੰਦੀ ਹੈ ਨਾ ਤੇ ਮਨੋਂ ਨਾ ਵਿਸਾਰੀਆਂ ਜਿਹੜੇ ਜੁੜੇ ਹੋਏ ਆ ਉਹ ਕਦੇ ਵੀ ਮਨੋਂ ਵਿਸਰਨ ਗਏ ਹੈ ਜੀ ਜਿਹੜੇ ਪੈ ਗਏ ਪਿੱਛੇ ਲੱਗ ਗਏ ਉਹਨੂੰ ਕਿਵੇਂ ਠੀਕ ਹੈ ਜਿਹੜਾ ਆਪਣੇ ਪਿੱਛੇ ਪਿੱਛੇ ਆਉਂਦੀ ਹੈ ਗੱਡੀ ਜੇ ਕਿਤੇ ਆਪਾਂ ਨੂੰ ਪਤਾ ਲੱਗੇ ਆਪਣਾ ਪਿੱਛੇ ਰਹਿ ਗਏ ਆਪਾਂ ਰੋਕ ਕੇ ਉਹਨੂੰ ਰੋਕ ਨਾਲ ਧਿਆਨ ਰੱਖਦੇ ਆ ਪਿੱਛੇ ਤੁਸੀਂ ਸੇ ਤਾਂ ਇਹ ਕਦੇ ਪੈ ਜਾਣਾ ਧਿਆਨ ਉਹਦੇ ਹੀ ਰੱਖਦੇ ਆ ਪਿੱਛੇ ਉਹ ਸਾਡੇ ਨਾਲ ਰਿਲੇਟਡ ਨਹੀਂ ਉਹ ਜਿਹੜੇ ਦਾ ਮੱਦੀ ਮੁੜਦਾ ਰਹੇ ਲੈਣਾ ਵਿੱਚੇ ਜੀ ਸਾਥ ਜਨ ਜਨ ਮਨ ਸੱਧਿਆ ਜਾਂਦਾ ਜਨ ਬਣ ਜਾਂਦਾ ਅਸਲ ਤੇ ਜਨ ਉਹ ਪਦਾਰਥ ਬਣਿਆ ਹੋਇਆ ਜਦ ਇਹਨੂੰ ਜਨ ਪਦਾਰਥ ਬਣ ਗਿਆ ਤਾਂ ਜਨ ਅੱਛਾ ਜੀ ਪਾਇਦਾਵਾਨ ਹੈ ਜਨਪਦਾਲ ਸੁਲ ਗਿਆ ਜਾਨ ਹੈ ਨਾਲ ਕੇ ਜਨਤਾ ਹੈ ਜਨਪਦਾਲ ਸੁਲਿਆ ਹੋਇਆ ਸਾਧ ਜਨਾ ਕੇ ਸੰਤ ਭਵਜਲ ਤਾਰੀਆਂ ਸਾਧੋ ਨਹੀਂ ਜਿਹੜੇ ਜਨਪਦਾਲ ਸਾਧ ਜਨ ਨੇ ਨਾਲ ਕੱਲਾ ਸਾਧ ਨਹੀਂ ਲਿਖਿਆ ਹੋਇਆ ਕੱਲਾ ਸਾਧ ਕਿਤੇ ਪ੍ਰਮਾਣ ਨਹੀਂ ਕੱਲਾ ਸੰਤ ਕਿਤੇ ਪ੍ਰਮਾਣ ਨਹੀਂ ਸਭਨਾਂ ਅਰਸ ਠੱਗ ਨੇ ਜਿਹੜੇ ਸੰਤ ਜਨ ਹੈ ਕਿਉ ਸਾਧ ਜਨ ਹੈ ਉਹ ਪ੍ਰਵਾਨ ਹੈ ਗੁਰਬਾਣੀ ਚ ਜਿਹੜੇ ਕੱਲੇ ਸਾਧ ਲਿਖੀ ਫਿਰਦੇ ਨੇ ਉਦੋਂ ਦੇ ਪੱਠੇ ਹੀ ਨੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਬਣਦੀ ਕੀ ਹੈ ਜਨ ਲਾਇਆ ਕਿਉਂ ਹੈ ਸਾਖਤ ਦੁਸ਼ਟ ਤਿੰਨ ਪ੍ਰਕਾਰ ਦੇ ਲੋਕ ਨੇ ਜਿਹੜੇ ਗੁਰਮਤਿ ਵਿਰੋਧ ਕਰਦੇ ਗੁਰਮਤਿ ਦਾ ਹਨੂਦ ਕਰਨ ਵਾਲੇ ਇਸ ਸੰਤ ਜਨਾਂ ਦਾ ਸਾਧ ਜਨਾਂ ਸਾਧ ਜਨ ਨੂੰ ਵਿਦੇਸ਼ ਕਰਦੇ ਸਾਲ ਫਪਸਾਂ ਕਰਦੇ ਬਾਹਰ ਕਰਦੇ ਤਿੰਨ ਪ੍ਰਕਾਰ ਦੇ ਧੋਖ ਇਹਨਾਂ ਦਾ ਵਿਰੋਧ ਕਰਦੇ ਉਹਨਾਂ ਨੂੰ ਬਤਾਵੀਂ ਕੱਢ ਕੇ ਅਸੀਂ ਗਾਂਹ ਰਾਜ ਕੀਤੇ ਅਸੀਂ ਤਾਂ ਗੱਲ ਹੀ ਰਹਿ ਜਾਣੇ ਜੇ ਲੀਡਰੇ ਲੀਡਰ ਰਹਿ ਜਾਣ ਬਬਲੇ ਕੋਖੜ ਲੀਡਰ ਲੀਡਰ ਰਹਿ ਜਾਣ ਜੀ ਪਾਰਟੀ ਜੀ ਅਜੇ ਰਹੇ ਹੋਏ ਨੇ ਅਕਾਲੀ ਪਾਰਟੀ ਕਈ ਬਣੀਆਂ ਹੋਈਆਂ ਉਹ ਜਿਹੜੇ ਲੀਡਰ ਕੋਈ ਨਾਲ ਉਹਨਾਂ ਨੇ ਐ ਜਾ ਕੋਈ ਚਾਹੁੰਦੇ ਪਬਲਿਕ ਜਾਵੇ ਅਸੀਂ ਰਾਜਨੀਤਿਕ ਦੁਸ਼ਟ ਖਿਨਾ ਮਾਹੇ ਦੀ ਬੋਲੀ ਚ ਉਹਨਾਂ ਦੇ ਉਪਦੇਸ਼ ਚ ਜਿਹਦੀ ਸ਼ਕਤੀ ਹੁੰਦੀ ਹੈ ਸਾਖ ਤਨ ਤੱਕ ਦੁਸ਼ਟ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਦੇ ਇੱਕ ਗੱਲ ਦੀ ਕਰ ਸਕਦੇ ਪਬਲਿਕ 'ਚ ਖੜੇ ਹੋ ਕੇ ਆਪਣੇ ਆਪ ਨੂੰ ਸਿੱਧ ਨਹੀਂ ਕਰ ਸਕਦੇ ਅਸੀਂ ਧਰਮ ਬੋਲਤੀ ਬੰਦ ਹੋ ਜਾਂਦੀ ਹੈ ਪਬਲਿਕ ਦੇ ਵਿੱਚ ਉਹਨਾਂ ਦੀ। ਸਤ ਸੰਤ ਧਿਆਨ। ਸਾਧ ਜਨ। ਕਰਦੇ ਨੇ, ਉਪਦੇਸ਼ ਕਰਦੇ ਨੇ ਸੰਸਾਰ ਨੂੰ। ਤਾਂ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ ਕਹਿਣ ਦਾ ਮਤਲਬ ਇਹ ਹੈ। ਚੁੱਪ ਹੋ ਜਾਂਦੇ ਨੇ। ਉਲੂਆ ਉਹ ਖੱਡਾ ਜਾ ਵਰਦੇ ਨੇ ਉਹਦੇ ਚੜਦੇ। ਸੂਰ ਚੜਵੇ ਉਹਨੂੰ ਖੱਡ 'ਚ ਵੱੜ ਜਾਂਦਾ। ਰਾਤ ਨੂੰ ਉਡਾਦਾ ਜਾਉਂਦਾ ਜਿੱਤੇ ਲੋਕਾਂ ਦਾ ਰਾਜੇ ਹੁੰਦੇ ਬਿਜਾਰੀਆਂ ਤੋਂ ਕੀ ਭਾਵੇਂ ਜੀ ਉਡਾ ਕੇ ਉਡਾ ਕੇ ਲੋਕ ਬਿਡਾਰਨ ਜਾਏ ਕਾੜਗਵੀ ਪੱਕੀ ਸੀ ਕੋਦਰੇ ਦਾ ਖੇਤ ਸੀ ਹਾਂਸ ਜਾ ਬੈਠਿਆ ਕੋਲ ਲੋਕ ਬਜੇ ਨੂੰ ਉਡਾ ਦਈਏ ਲੋਕ ਬਿਡਾਰਨ ਜਾਏ ਲੋਕੋ ਨੂੰ ਉਡਾਉਣ ਜਾਂਦੇ ਨੇ ਉਡਾਉਣ ਕਾਤੇ ਜਾਂਦੇ ਨੇ ਸਾਡੀ ਸੰਗਤ ਬਗਾਰ ਦੂਏ ਸਾਡੀ ਇਹ ਸੰਗਤ ਨੂੰ ਸਮਝਾਤਾ ਸਾਡੇ ਜੋਗੀ ਨਹੀਂ ਰਹੜੀ ਇਹ ਜਿਨ੍ਹਾਂ ਖੋਦੜਾ ਖਾਇ ਠੀਕ ਹੈ ਜੀ ਹਾਂਜੀ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਟੇਕ ਟਕਾਇਆ ਜਿਹੜੇ ਸਾਹਿਬ ਦੇ ਬਹੁਤ ਡੂੰਘਾ ਬਹੁਤ ਡੂੰਘਾ ਬਹੁਤ ਡੂੰਘਾ ਪਰ ਜਿਹੜੀ ਸਾਹਿਬ ਆ ਉਦੇ ਥੱਲੇ ਲੱਗੇ ਨੇ ਦੇ ਅੱਛਾ ਜੀ ਉਹ ਪਾਬਸਾਗਰ ਤੋਂ ਵੱਡਾ ਹੈ ਉਹਦੀ ਟੇਕ ਦਾ ਫਾਮ ਹੈ ਜਿਹੜੀ ਦੱਲ ਲੱਗੀ ਹੈ ਚੀਜ਼ ਠੀਕ ਹੈ ਜੀ ਤੇ ਸਾਹਿਬ ਦੀ ਟੇਕ ਨਾਂਕ ਬਣਾਈ ਆਰ ਪਾਰ ਹੈ ਪਹਿਨਾ ਵੀ ਪਾਬਸਾਗਰ ਤੋਂ ਪਰੇ ਹੈ ਸਰ ਕਰਕੇ ਕੋਈ ਪਾਬਸਾਗਰ ਤੋਂ ਪਰੇ ਹੈ ਉਹ ਕੌਣ ਹੈ ਚਿੱਤ ਹੈ ਭਾਇਆ ਤੋਂ ਲਿਖਤ ਲਿਖਤ ਹਕਰੀ ਉਹ ਸਾਬ੍ਹਰੀ ਟੇਕ ਦੀ ਐ ਉਹ ਸਾਬ੍ਹਨਾ ਤਾਂ ਟੇਕ ਲਈ ਹੋਈ ਨਹੀਂ ਸੀ ਨੇ ਅੱਜ ਸਈ ਉਹਦੀ ਤਾਂ ਠੀਕ ਹੈ ਜੀ ਟੇਕ ਤਾਂ ਅੰਦਰੇ ਸੀ ਬਾਹਰੋਂ ਸੀ ਠੀਕ ਹੈ ਜੀ ਜਿਸ ਸਿਮਰਤ ਸੁਖ ਵੇਸ ਅਗਲੇ ਦੁਖ ਜਾਣ ਜਿਸ ਸਿਮਰਨ ਸੁਖ ਵੇਸ ਅਗਲੇ ਦੁਖ ਜਾਣ ਜਿਹੜੇ ਸਿਮਰਨ ਨਾਲ ਸੁੱਖੇ ਸੁਖਾਂ ਦੀ ਪ੍ਰਾਪਤੀ ਹੋ ਸਾਰੇ ਦੁੱਖ ਚਲੇ ਜਾਣਗੇ ਉਹ ਸੇਵਨ ਸ਼ੁਰੂ ਹੋ ਗਿਆ ਉਹ ਸੇਵਨ ਨੂੰ ਮਿਲ ਗਿਆ ਕਿਉਂ ਨਾ ਸਾਹਿਬ ਨੂੰ ਸਮਰਦਾਈ ਰਹੂਗਾ ਟੇਕ ਖੜਕ ਕੇ ਡੁੱਬਣਾ ਠੀਕ ਹੈ ਜੇ ਸਮੁੰਦਰ ਦੇ ਵਿੱਚ ਬਾਅੰਸ ਫੜਿਆ ਤੇ ਇੱਕ ਜਿਵੇਂ ਜਰਾ ਧਿਆਨ ਦੀ ਰੱਖੂ ਜੇ ਤੇ ਤਾਂ ਆਪੇ ਬਣਾ ਦਰਦੇ ਦਾ ਠੀਕ ਹੈ ਜੀ ਭਾਵੇਂ ਭਗਤ ਨਾ ਹੋਏ ਤੇਰੀ ਉਹਨਾਂ ਡੋਪਣਾ ਬਾਹਰ ਛੱਡ ਕੇ ਜਿਸ ਸਿਮਰਤ ਸੁਖ ਹੋਏ ਤਖਲੇ ਦੁਖ ਜਾਣ ਠਗਲੇ ਦੁਖ ਜਾਣ ਆ ਕੁੜੀ ਨਿਰੰਜਨ ਪੁਰਖ ਅਗਮ ਅਗਮ ਅਵਦੇ ਨਹੀਂ ਹੁੰਦਾ ਲਫਜ਼ ਅਗਭ ਅੱਛਾ ਜੀ ਅਗਮ ਆਪ ਇਹਨੂੰ ਅਗੋ ਪੜੀ ਜਾਂਦੇ ਨੇ ਗਲਤ ਪੜਦੇ ਨੇ ਅਗਮ ਹੁੰਦਾ ਹੈ ਮਨਬੁੱਧੀ ਤੋਂ ਪਰੇ ਬਹਰ ਬੁੱਧੀ ਦੀ ਸਮਝ ਤੋਂ ਪਰੇ ਅਗਮ ਅਗਾਧ ਪਾਰ ਸੋਏ ਜੋ ਜੋ ਕਹੇ ਸੁ ਮੁਕਤਾ ਹੋਏ ਕਿ ਹੋਤੇ ਅਗਮ ਖਾਦੇ ਪੜਦੇ ਨੇ ਇੱਥੇ ਅਗਮ ਕਿਉਂ ਪੜਦੇ ਨੇ ਜੀ ਆ ਕੁਲ ਨਿਰੰਜਨ ਪੁਰਖ ਅਪਾਰੀ ਅਗਮ ਅਪਾਰੀਆ ਜੇ ਅਗਮ ਠੀਕ ਹੈ ਜੀ ਬਣ ਸਕਦਾ ਅਗਮ ਨਾਲ ਬਾੜੀਆ ਜੁੜਦਾ ਹੀ ਨਹੀਂ ਹੈ ਹਾਂਜੀ ਸੱਚੋ ਸਤਿ ਔਰ ਕੁੱਲ ਨਾ ਜਨਪੁਰਖ ਪਗਮ ਅਪਾਰੀ ਕੁੱਲ ਰਹਤਾ ਕੁੱਲ ਨਹੀਂ ਹੈ ਕੁੱਲ ਕੋਈ ਕਿਤੇ ਸੰਸਾਰ ਦੀ ਕੋਈ ਕੁੱਲ ਹੀ ਨਹੀਂ ਬ੍ਰਾਹਮਣੇ ਕੋਲ ਬਣੀ ਜੁਰਬਾਣੀ ਦੇ ਠੀਕ ਹੈ ਨਾ ਕੁੱਲ ਮੰਦੀ ਹੈ ਨਾ ਕੋਈ ਫਿਰਕਾ ਮੰਦੀ ਹੈ ਗੁਰਬਾਣੀ ਨਾ ਕੋਈ ਵਖਰੀ ਹੋਂਦ ਮੰਦੀ ਹੈ ਗੁਰੂ ਕੀ अच्छा जी अकुल निरंजन पुरुष अगम अपारिय अगम अपारिय अकुल निरंजन आ जिला अगम बुद्धि तो परे है ये समझ सकदा आदमी अपने आप ठीक है जी गुरु बिन ज्ञान ना होए इसका अगम अपारिय अपार है बड़ी बुद्धि तो परे दी गल है कुत्ते बुद्धि तो परे दी गल है एदा गुरु बिन ज्ञान ना होए हां जी सच्चो सच्चा ਸੱਚੋਂ ਸੱਚਾ ਸੱਚੋਂ ਜੋ ਪੈਦਾ ਹੋਇਆ ਹੋਇਆ ਉਹ ਵੀ ਸੱਚੇ ਐ ਦਿੱਕੀ ਲਾ ਕੇ ਪੜਾ ਪਊਗਾ ਸੱਚ ਤਾਂ ਹੱਥ ਨਹੀਂ ਮੜਨਾ ਕੋਈ ਸੱਚੋਂ ਸੱਚ ਤੋਂ ਜੋ ਸੱਚ ਪੈਦਾ ਹੋਇਆ ਹੋਇਆ ਜੋ ਸੱਚ ਤੋਂ ਕਟਿਆ ਹੋਇਆ ਜੋ ਸੋਨੇ ਦੇ ਟੁਕੜਾ ਕਟਿਆ ਕੱਟ ਕੇ ਮੋਕੜਾ ਬਣਾ ਲਿਆ ਸੋਨਾ ਹੀ ਐ ਸੱਚੋਂ ਸੱਚਾ ਸੱਚ ਸੱਚ ਨਿਹਾਰੀ ਐ ਸੱਚ ਨੇ ਆਰੀ ਉਹ ਸੱਚ ਕਰਕੇ ਹੀ ਜਾਣਾ ਚਾਹੀਦਾ ਧੋਈ ਮੋਈ ਮੋਈ ਤੋ ਯੰਤਰ ਕੈਸਾ ਕੋਈ ਦਾ ਭਗਤ ਕਹੇ ਕਣ ਕੰਡ ਕੇ ਜਲ ਤਰੰਪ ਜੈਸਾ ਜਿਵੇਂ ਜਲ ਚੋਂ ਤਰੰਗ ਉੱਠੀ ਹੈ ਜਲੇ ਉਹ ਸੋਨੇ ਜੋ ਕੜਾ ਬਣਾ ਲਿਆ ਸੋਨਾ ਹੀ ਉਹ ਸੱਚ ਚੋਈ ਪੈਦਾ ਹੋਇਆ ਹੈ ਜਲ ਚੋਈ ਪੈਦਾ ਹੋਈ ਹੈ ਤਰੰਗ ਹਾਂਜੀ ਉਹ ਰੂਪ ਹੈ ਸਾਡੇ ਕੋਲੇ ਦਾ ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ ਉਹਨੂੰ ਸੱਚ ਕਰਕੇ ਹੀ ਦੇਖਣਾ ਚਾਹੀਦਾ ਸੱਚ ਕਰਕੇ ਹੀ ਮੰਨਣਾ ਚਾਹੀਦਾ ਗੂੜ ਦਾ ਜਾਪ ਹੈ ਤੇਰੀ ਧਾਰੀ ਹੈ ਗੂੜ ਦਾ ਜਾਪ ਹੈ ਕੁਝ ਫੇਰ ਰਿਹਾ ਫਿਰ ਗੂੜ ਤੇ ਤੇਰੀ ਸਿੱਖਿਆ ਨੂੰ ਤਾਂ ਕਰ ਲਵੇ ਸਭ ਸੱਚੇ ਸੱਚ ਹੈ ਗੂੜ ਕੁਝ ਵੀ ਨਹੀਂ ਫਿਰ ਗੂੜ ਤਾਂ ਬੁੱਧੀ ਹੋਣ ਲਈ ਕਰਕੇ ਹੈ ਅੱਛਾ ਕਰਕੇ ਗੂੜ ਹੈ ਸਭ ਸੇ ਦਾਤਾਰ ਰਜੇਤ ਉਪਾਰੀਏ ਸਭ ਸੇ ਫਾਇਦੇ ਦਾ ਬਾਹਰ ਸਾਰਾ ਕੁਝ ਦਦਾਰੇ ਜੇ ਸਰੀਰ ਕਰਕੇ ਵੀ ਦੇ ਰਿਹਾ ਤਾਂ ਵੀ ਉਹ ਦੇ ਜੇ ਗਿਆਨ ਤਰ੍ਹਾਂ ਦੇ ਜਹਜੇ ਜਿਦੀ ਕੋ ਲੋੜ ਹੈ ਉਹਨਾਂ ਗਿਆਨ ਦੇ ਰਿਹਾ ਉਹ ਵੀ ਉਹੀ ਦੇ ਰਿਹਾ ਸਭ ਸੇ ਦੇਦਾਤਾ ਰਜੇਤ ਉਪਾਰੀਏ ਜੇਤੋ ਉਪਾਰੀਏ ਜਿਹਨੂੰ ਪਰ ਚੱਕਣਾ ਹੈ ਗੁਰੂ ਬਸਤੂ ਦੇ ਰਿਹਾ ਠੀਕ ਹੈ। ਕੋਪਾਲਾ ਉਹਨੇ ਉੱਪਰ ਚੱਕਣਾ। ਇਹ ਕਿਉਂਕਿ ਬਾਗਰ ਦੇ ਬਾਹਰ ਕੱਢਣਾ ਹੈ ਆ ਥੋੜਾ ਬਹੁਤ ਉੱਚਾ ਚੱਕਣਾ ਹੈ। ਬਸ ਤੂੰ ਦੇਦਾ ਜੀ। ਡੁੱਬਦੇ ਆਸੇ ਆਪਣੇ ਵਰਜੀ ਨਾਲ ਚੱਕਦਾ ਉਹ ਆਪਣੀ ਕੋਸ਼ਿਸ਼ ਲੋ। ਸੂਤ ਪਰੋਏ ਜੋਤ ਸੰਜਾਰੀ ਹੈ। ਸੂਤ ਪਰੋਏ, ਸੂਤ ਪਰੋਏ ਸਾਰੇ। ਇੱਕੇ ਸੂਤ ਪਰੋਏ ਬਣੀ। ਇਕੋ ਆਕਾਸ਼ ਰੂਪੀ ਸੂਤਰ ਹੈ ਕੋਲ ਆਪਣਾ ਰੱਖਿਆ ਹੋਇਆ ਸੱਚ ਤੇ ਪਤਨਾ ਪਿਆ ਆਕਾਸ਼ ਉਹਦੇ ਕੋਲ ਹੈ ਉਹਦੇ ਵਿੱਚ ਸਾਰੇ ਪਰੋਕੇ ਰੱਖੇ ਨੇ ਜੋਤ ਸੰਜਾਰੀ ਜੋਤ ਸਾਰੇ ਸੱਚਰੀ ਹੋਈ ਹੈ ਰੱਖੀ ਹੋਈ ਜੋਤ ਅਭੀ ਆ ਜਲ ਵਿੱਚ ਤੇਰਾ ਬਾਸ ਹੈ ਜਲ ਹੈ ਸ਼ਰੀਰ ਦੇ ਵਿੱਚ ਉੱਤੇ ਬਬੀਏ ਦਾ ਬਾਸ ਹੁਕਮ ਹੈ ਭਵਜਲ ਮੰਝ ਹੁਕਮ ਤਾਰੀ ਹੈ ਜਿਹੜਾ ਆਪਣਾ ਹੁਕਮ ਹੈ ਜੀਵ ਦਾ ਉਹਦੇ ਨਾਲ ਦਾ ਭਵਜਲ ਦੇ ਵਿੱਚ ਰਹਿੰਦਾ ਹੁੰਦਾ ਜੀ ਤਾਂ ਵਿੱਚ ਅੱਛਾ ਜੀ ਹੁਕਮੇ ਭਵਜਲ ਮੰਜ ਹੁਕਮੇ ਤਾਰੀ ਹੈ ਹੁਕਮ ਨਾਲੇ ਦਰਦਾ ਆਪਣੇ ਇਛਾ ਨਾਲੇ ਦਰਦਾ ਆਪਣੇ ਇਛਾ ਨਾਲੇ ਵਿੱਚ ਰਹਿੰਦਾ ਸਾਗਰ ਦੇ ਜੇ ਤਾਂ ਰਹਿਣਾ ਚਾਹੁੰਦਾ ਹੈ ਕੋਈ ਨਹੀਂ ਕਹਿੰਦਾ ਮਜਬੂਰ ਕਰਦਾ ਤੂੰ ਜਾ ਭਾਈ ਉਪਦੇਸ਼ ਕਰਤਾ ਸਭ ਨੂੰ ਗੁਰਬਾਣੀ ਦੇ ੱੱਕੇ ਮਾਰ ਮਾਰਨੀ ਵਾਲੀ ਲੈ ਕੇ ਜਾਂਦੀ ਠੀਕ ਹੈ ਜੀ ਗ੍ਰਫਤਾਰ ਕਰਕੇ ਕਿਸੇ ਥੋੜੀ ਲੈ ਕੇ ਜਾਂਦੀ ਬਹੁਤ ਵਧੀਆ ਵਧੀਆ ਪਦਾਰਥ ਵੀ ਹਾਂਜੀ ਇੱਥੇ ਰਹਿਣਾ ਇੱਥੇ ਰਹਿ ਤੇਰੀ ਮਰਜ਼ੀ ਹੈ ਠੀਕ ਹੈ ਜੀ ਤੇਰੀ ਇੱਛਾ ਹੈ ਉਧਰ ਜਾ ਦੇ ਚੋਂ ਉਧਰ ਵੀ ਚਲੇ ਜਾ ਠੀਕ ਤੇਰੇ ਨੇ ਦੋਏ ਨੇ ਤੇਰੇ ਵਾਸਤੇ ਇਹਦੇ ਕੋਲ ਦੋ ਹੁਕਮਾਂ ਇਹਦੇ ਆਪਣੇ ਨੇ ਇਥੇ ਦੀ ਗੱਲ ਹੈ ਜੀਵ ਦੀ ਇੱਕ ਪਰਪਲਉਣ ਵਾਲਾ ਹੋਕਮ ਹੈ ਇੱਕ ਭਗਤੀ ਠੀਕ ਹੈ ਜੀਵ ਆਪਣੀ ਇੱਛਾ ਨਾਲ ਜੀਵ ਹਾਂਜੀ ਭਗਸਾਦਰ ਤੇ ਰਹਿੰਦਾ ਆਪਣੇ ਇੱਛਾ ਨਾਲ ਭਗਸਾਦਰ ਛੱਡਦਾ ਬਸ ਠੀਕ ਹੈ ਜੀ ਪ੍ਰਭ ਜੀ ਉਹ ਜਿਸ ਭਾਗ ਮਥਾਰੀ ਹੈ ਤੇਰੀ ਗਤਮਿਤ ਲਕੀ ਨਾ ਜਾਏ ਹਉ ਤੁਧ ਬਲਹਾਰੀ ਹੈ ਜੀ ਤੈਨੂੰ ਗੋੜ ਤੇ ਹੁੰਦੇ ਨੇ ਜਿਹੜੇ ਕੰਮ ਨੇ ਨਾ ਕਿਉਂ ਦੇ ਰਹੇ ਨੇ ਬੇਰੇ ਦ੍ਰਿਸ਼ਟੀ ਕੋਲ ਤੋਂ ਉਹਨਾਂ ਦੇ ਮੱਥੇ ਦੇ ਭਾਗ ਚੱਗੇ ਦੀ ਰਾਇ ਹੈ ਇਹ ਨਾ ਪਰਮੇਸ਼ਰ ਦੀ ਰਾਇ ਹੈ ਦਾ ਜੀਵ ਦੀ ਰਾਇ ਠੀਕ ਹੈ ਜੀ ਤੇ ਹੈ ਜਿਹੜਾ ਐਤੋ ਭਗ ਸਾਗਰ ਜੋ ਪਾਰ ਹੋ ਗਿਆ ਜੀ ਨੂੰ ਸੁੱਖ ਮਿਲਿਆ ਇਹ ਉਹਦੀ ਰਹਿ। ਵੀ ਬੇਨੂੰ ਕਹੇ ਜਾਂ ਸੁੱਖ ਹੋਇਆ ਛੱਡ ਕੇ। ਮੈਂ ਸਮਝਦਾ ਆਪਣੇ ਜਿਹੜੇ ਜਿਹਨਾਂ ਦੇ ਅੰਦਰ। ਠੀਕ ਹੈ ਜੀ। ਭਗ ਸਾਗਰ ਹਾਂਜੀ ਠੀਕ ਹੈ। ਉਹਨਾਂ ਦੇ ਮੱਥੇ ਦੇ ਭਾਵੇਂ ਠੀਕ ਨੇ। ਬਾਕੀਆਂ ਦੇ ਗਲਤ ਨੇ। ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਹਾਰੀ। ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਹਾਰੀ। ਹੁਣ ਇਹ ਕਿਨੂੰ ਗਿਆ? ਪਰਮੈਸ਼ਰ ਨੂੰ ਨਹੀਂ ਕਿਹਾ ਇਹ ਵੀ ਇਹਨੂੰ ਕਿਹਾ ਇੱਕ ਨੂੰ ਅੱਛਾ ਜੀ ਤੇਰੀ ਗੱਲ ਮੈਂ ਤਲਾਕ ਹੀ ਨਾ ਜਾਇਆ ਤੂੰ ਬਲੇਯਾ ਕਹਿੰਦਾ ਤੂੰ ਕਿਉਂ ਹੈ ਤੁੱਕਿਆ ਜਿ ਰਹਿਣਾ ਚਾਹੁੰਦਾ ਕਿਉਂ ਦੇਈ ਚਾਹੁੰਦਾ ਸਦਾ ਸੁਖ ਉਹ ਤੂੰ ਵੀ ਹੈ ਸਦਾ ਸੁਖ ਚਾਹਾਂ ਜਾਂ ਸਦਾ ਸੁਖ ਦੀ ਗੱਲ ਕਹਿੰਦੇ ਵੀ ਐ ਮਿਲ ਜੂਗਾ ਨਹੀਂ ਤਾਂ ਤੇਰੀ ਗਤ ਵਿੱਚ ਲੱਖੀ ਨਾ ਜਾਏ ਹਾਂ ਤੂੰ ਬਲਹਾਰੀ ਤੇਰੀ ਕਿਸਮਤ ਵਿੱਚ ਲੱਖੀ ਨਾ ਜਾਏ ਜੀਵਨੂ ਸਭ ਕੋ ਸੁਣ ਕੇ ਕੁਰਬਾਨੀ ਦਾ ਹਾਂ ਕਰਦਾਂਗਾ ਮੋੜੇ ਤੋਂ ਬਾਹਰ ਜਾ ਕੇ ਕਪੜੇ ਇਹ ਝਾੜ ਕੇ ਨਾ ਕਰਦਣ ਠੀਕ ਹੈ ਜੀ ਐਸਾ ਗੱਲ ਦੀ ਸਮਝ ਨਹੀਂ ਆਉਂਦੀ ਕੀ ਗੱਲ ਮੁਕਰ ਵੀ ਜਾਂਦਾ ਦਫਾ ਹੋਣਾ ਮੁਕਰ ਗਿਆ ਫਿਰ ਤਾਂ ਗਈ ਕਿਨੇ ਔਰ ਅਜ ਅਜ ਮੰਨ ਕੇ ਨਹੀਂ ਮੁਕਰੇਗਾ ਕੀ ਪਤਾ ਜਦ ਆਇਆ ਸੀ ਉਹਦਾਰੇ ਮਨੇਗਾ ਨਹੀਂ ਬਨੇਗਾ ਜਾਂ ਬਨ ਕੇ ਮੁਕਰ ਜਾਏਗਾ ਇਹਦਾ ਹੀ ਪਤਾ ਲੱਗਦਾ